ਸ਼ਲੋਕ ਮਹੱਲਾ ਤੀਜਾ ਮਨਮੁਖ ਕਾਇਰ ਕਰੂਪ ਹੈ ਬਿਨ ਨਾਮ ਹੈ ਨਕ ਨਾਹੈ ਅੰਦਿਲ ਸੁਪਨੇ ਵੀ ਸੁਖ ਨਾਹੈ ਮਨੋਗਰੀ ਗੱਲ ਚੱਲਦੀ ਪਹਿਲਾਂ ਗੁਰ ਦੀ ਗੱਲ ਚੱਲਦੀ ਸੀ ਮਨਮੁਖ ਪਹਿਲਾਂ ਤਾਂ ਕਾਇਰ ਹੁੰਦਾ ਉਹ ਵਾਣ ਕਬੂਲ ਹੀ ਨਹੀਂ ਕਰ ਸਕਦਾ ਮਨ ਖੂਲ ਕਰਨਾ ਕਿਤੇ ਸੁਖ ਹੈ ਉਹ ਸੂਰਮਿਆਂ ਦਾ ਕੰਮ ਇਹ ਤਾਂ ਮਰਦਾ ਮੈਂ ਕੰਮ ਹੈ ਕਾਲ ਮਰਦੀ ਕਾਲੀ ਮਰਦ ਕਬੂਲ ਕਰਦੇ ਨੇ ਪਹਿਲਾ ਵੰਡ ਕਬੂਲ ਕਾਲ ਨੇ ਨਾ ਉਹ ਤਾਂ ਕ੍ਰੂਪ ਹੁੰਦਾ ਉਹਨਾਂ ਦਾ ਤਾਂ ਰੂਪ ਹੀ ਹੁੰਦਾ ਠੀਕ ਕ੍ਰੂਪ ਹੈ ਬਿਨ ਆਵੇ ਨਕਲਾਂ ਨੇ ਨਾ ਉਹਦੀ ਤਾਂ ਨੱਕ ਕਾਲਾ ਰਹਿ ਗਿਆ ਉਹਨਾਂ ਦਾ ਨੱਕ ਤਾਂ ਨਾ ਉਹਨਾਂ ਉਹ ਨੱਟਦੇ ਨੇ ਨਾ ਕੋੜਲੇ ਨੇ ਉਹ ਬੋਲਣ ਵਾਲੇ ਨੂੰ ਨਕਵੱਢਾ ਕਹਿ ਸਕਦੇ। ਇਹਦੀ ਸਵਾਲ ਕਰਤਾ ਠਗੀਆਂ ਵਾਲਿਆਂ ਨੇ ਨਕਵੱਢੇ ਹੀ ਧੰਦੇ ਵਿਆਪਿਆ ਆਪਣੇ ਭੀ ਸੁਖ ਨੇ ਦਾ ਧਰਮ ਦਾ ਦਬਾ ਨੇ ਤਾਂ ਬਣਾਇਆ ਹੁੰਦਾ ਝੂਠ ਬੋਲਦੇ ਨੇ। ਸਮਝੇ ਦੀ ਠਗੀਆਂ ਮਾਰਦੇ ਨੇ ਲੋਕਾਂ ਨਾਲ ਅਈ ਉਹ ਨੂੰ ਹੋ ਮਿਲ ਗਿਆ ਉਹ ਨੂੰ ਹੋ ਮਿਲ ਗਿਆ ਆਏ ਹੋ ਜਾਂਦਾ ਹੈ ਜਾਗਦਿਆਂ ਨੂੰ ਤਾਂ ਕੀ ਸੁਖ ਹੋਣਾ ਹੈ ਉਹਨਾਂ ਨੂੰ ਤਾਂ ਸੁਪਨੇ ਚ ਵੀ ਸੁੱਖ ਨਹੀਂ ਹੋ ਸਕਦਾ ਨਾਨਕ ਗੁਰਮੁਖ ਹੋਵੇਂ ਤਾਂ ਉੱਬਰੈ ਨਹੀਂ ਤਾਂ ਵੱਧੇ ਸਹਾਈ ਅਰੇ ਹੋ ਜਾਣਾ ਤਾਂ ਵਜ ਜਾਂਦੇ ਹਨ ਦੁੱਖਾਂ ਤੋਂ ਉੱਪਰ ਆ ਜਾਂਦੇ ਰਹਿ। ਜੀ ਤਾਂ ਬਨੇ ਹੋਏ ਜਾਂਦੇ ਜਾਲ ਦੇ ਵਿੱਚ ਦੁੱਖੇ ਤੀਜਾ। ਸੁਰਮੁਖ ਸਦਾ ਦਰ ਸੋਹਣੇ ਗੁਰ ਕਾ ਸ਼ਬਦ ਕਮਾਹੇ ਅੰਤਰ ਸ਼ਾਂਤ ਸਦਾ ਸੁਖ। ਦਰ ਸੱਚੇ ਸੋਭਾ ਪਾਹੇ ਜਿਲੇ ਗੁਰਮੁਖੀ ਨਾ ਗੁਰੂ ਦੇ ਰਾਹ ਗੁਰੂ ਦੇ ਭਾਲੀ ਚ ਰਹਿਣ ਵਾਲੇ ਪਰਮੇਸ਼ਰ ਦੇ ਭਾਲੀ ਚ ਰਹਿਣ ਵਾਲੇ ਸਦਾ ਦਰ ਸੋਹਣੇ ਉਹਦੇ ਦਰਗਾਹ ਦੇ ਵਿੱਚ ਸਦਾ ਹੀ ਸੋਹਣੇ ਲੱਗਦੇ ਨੇ ਹੁਣ ਭਗਤ ਜਿਹੜੇ ਉੱਥੇ ਬੈਠੇ ਨੇ ਸੋਹਣੇ ਨੇ ਉਹ ਇਹ ਦਰਤੇ ਹੁੰਦੇ ਨੇ ਐਵੇਂ ਹੀ ਲੱਗਦਾ ਲੋਕਾਂ ਨੂੰ ਵੀ ਇਹ ਸਰੀਰ ਚ ਨੇ ਉਹ ਸਰੀਰ ਦੇ ਵਿੱਚ ਤਾਂ ਐਵੇਂ ਜੀਦੇ ਹੀ ਹੁੰਦੇ ਨੇ ਉਹਦੇ ਦਰਤੇ ਹੁੰਦੇ ਨੇ ਦਰਗਾਹ ਦੀਆਂ ਨਾਲ ਕਾਹ ਕੁਝ ਹਰ ਦਾਗਾ ਗੇ ਵਾਕਾਂ ਨਾਨਕ ਆਹ ਤਾਹੀ ਸੁਣਾਉਂਦਾ ਹਜੇ ਨਾਨਕ ਦਰਗਾਹ ਚ ਖੜਾ ਹੈ ਦਰਗਾਹ ਸਰਬਵਿਆਪੀ ਹੋਇਆ ਹੈ ਦਰਗਾਹ ਕਿਹੜਾ ਐ ਸੰਸਾਰ ਤੋਂ ਵੱਖਰੀ ਐ ਅਵਸਥਾ ਦੀ ਗੱਲ ਹੈ ਬਾਹਰ ਨਾਲ ਜੁੜਿਆ ਤਾਂ ਨਰਕ ਚ ਹੈ ਜੇ ਉਹ ਤਾਂ ਸੁਖ ਸਾਗਰ ਤੇ ਵਿਚੇ ਹੈ ਬਾਹਰ ਤਾਂ ਹੈ ਨਹੀਂ ਇਹ ਇਹ ਦੇ ਚਿੱਤੇ ਦੀ ਗੱਲ ਹੈ ਹੁਣ ਆਪਾਂ ਕਹੂ ਨਹੀਂ ਦਰਗਾਹ ਦੇ ਵਿੱਚ ਕਿਵੇਂ ਸੋਹਣੇ ਲੱਗਦੇ ਨੇ ਜੀ ਉਹ ਹੈ ਇਹ ਉਹ ਹੈ ਸਾਗਰ ਤਾਂ ਸੁਖ ਸਾਗਰ ਦੇ ਵਿੱਚ ਹੈ ਤੇ ਇਹਦਾ ਪਾਸ ਦਾ ਦੀਨ ਗੁਰਮੁਖ ਸਦਾ ਦਰਸ ਕੋਣੇ ਉਹਦੇ ਸਰਵਾਜੇ ਤੇ ਖੜੇ ਰਹਿੰਦੇ ਨੇ ਉਹਦਾ ਹਰ ਵਕਤ ਸੋਹਣਾ ਨੇ ਉਹ ਲੱਗਦੇ ਥੋੜੇ ਨੇ ਉੱਤੇ ਗੜੇ ਛੱਗੇ ਲੱਗਦੇ ਨੇ ਇਹ ਕਰ ਲਿਆ ਜੀ ਸਦਾ ਸੁਖ ਸਦਾ ਜੇ ਸ਼ਾਂਤੀ ਆ ਤਾਂ ਸਦਾ ਸੁਖ ਵੀ ਹੈ ਜਰ ਸੱਚੇ ਸੋਭਾ ਪਾਏ ਸੱਚੇ ਦਰ ਤੇ ਉਹਦੀ ਸੋਭਾ ਹੁੰਦੀ ਹੈ ਸੋਭਾ ਪਾਉਂਦੇ ਨਾਨਕ ਗੁਰਮੁਖੀ ਆਰਾਮ ਪਾਇਆ ਇਹ ਜੇ ਜਿਹਾ ਸੱਚ ਸਮਾਇ ਗੁਰਮੁਖ ਖਾਨੇ ਹਲਾਂ ਪਾਇਆ ਔਰ ਉਹਨਾਂ ਦੇ ਅੰਦਰ ਸਹਿਜ ਅਵਸਥਾ ਹੋਈ ਹੈ ਟਿਕ ਗਏ ਨੇ ਟਕਾਓ ਆ ਗਿਆ ਮਨ ਨੂੰ ਦੇ ਸੱਚ ਚ ਸਮਾ ਗਏ ਜਿੰਨਾ ਚ ਲਹਿਰ ਚਲਦੀ ਹੈ ਆਵਾ ਚਲਦੀ ਹੈ ਉਹਨਾਂ ਚ ਲਹਿਰ ਵੀ ਚਲਦੀ ਹੈ ਜਦ ਲਹਿਰ ਖੜਦੀ ਹੈ ਜਿੱਤੇ ਸਮਾ ਜਾਂਦੀ ਹੈ ਪਾਣੀ ਇਵੇਂ ਬਣ ਇੱਕ ਲਹਿਰ ਹੈ ਮਨ ਰੁਕ ਗਿਆ ਆਪਣੇ ਬੂਰ ਚ ਸਮਾਇਆ ਲਹਿਰ ਜਿੱਤੇ ਰੁਕਦੀ ਹੈ ਉੱਥੇ ਹੀ ਆਪਣੇ ਬੂਰ ਚ ਸਮਾ ਜਾਂਦੀ ਹਾਂਜੀ ਠੀਕ ਹੈ ਜੀ ਪੌੜੀ ਗੁਰਮੁਖ ਪ੍ਰਹਿਲਾਦ ਜਪ ਹਰ ਗਤ ਪਾਈ ਗੁਰਮੁਖ ਜਨਕ ਹਰ ਨਾਮ ਲਿਵ ਲਾਈ ਦੇਖੋ ਪ੍ਰਲਾਦ ਵਾਸਤੇ ਜਿਹੜੀ ਸਾਕੀ ਆਈ ਹੈ ਨਾ ਆਪਣੇ ਕੋਲ ਅਸੀਂ ਸੁਣੀ ਹੈ ਦੇ ਵਿੱਚ ਵੀ ਗੁਰਮੁਖ ਸੀ ਆਹੀ ਵਿਧੀ ਪ੍ਰਲਾਦ ਨੇ ਬਣਾਈ ਹੈ ਗੁਰਮਤ ਅਲੀ ਵਿਧੀ ਹੀ ਪ੍ਰਲਾਦ ਨੇ ਬਣਾਈ ਸੀ ਪਰ ਲਾ ਦੇ ਜਪੁ ਹਰ ਗੱਤ ਪਾਈ ਸਾਲ ਨੂੰ ਜਾਣਿਆ ਤਾਂ ਅੱਗੇ ਜਿੱਥੇ ਸੰਸਾਰ ਦਾ ਗਿਆਨ ਖੜਾ ਸੀ ਉਦੋਂ ਗਾਂ ਤੁਰ ਪਿਆ ਸੰਸਾਰ ਦਾ ਗਿਆਨ ਕਿਤੇ ਅਟਕਿਆ ਹੋਇਆ ਠੀਕ ਹੈ ਸੰਸਾਰ ਦੇ ਵਿੱਚ ਹੀ ਅੰਦਰੇ ਅੰਦਰ ਕੋ ਮੁਦਾ ਮਾਇਆ ਤੋਂ ਗਾਂ ਨਹੀਂ ਜਾਂਦਾ ਉਹ ਹਉਰਤੀ 'ਚੋਂ ਦਰਸ਼ਨ ਕਰਨਾ ਚਾਹੁੰਦਾ ਉਹ ਆਦਮੀ ਨੂੰ ਭਗਵਾਨ ਬੁਝਦਾ ਜਦੋਂ ਗੱਤ ਪਾਉਂਦਾ ਅੱਗੇ ਜਾਂਦਾ ਫਿਰ ਆਦਮੀ ਫਿਰ ਮਾਇਆ ਰਹਿ ਜਾਂਦੀ ਹੈ ਥੱਲੇ ਉਹ ਜਿਹੜਾ ਕਾਲ ਨਾ ਚੁਰਦਾ ਫੇਦਰਾਕਾਰ ਤੱਕ ਪਹੁੰਚ ਗਿਆ ਕਿ ਘੱਟ ਪਾਈ ਹੈ ਬੁੱਧੀ ਅੱਗੇ ਚੱਲ ਪਈ ਉਹਦੀ ਠੀਕ ਹੈ ਜੋਤ ਨੂੰ ਜਾਣਿਆ ਤਾਂ ਅੱਗੇ ਪੁੱਛਿਆ ਸੋ ਤਤੇ ਜਨਕ ਜਨਕ ਵੀ ਗੁਰਮ ਕੀ ਰਾਜਾ ਜਿਹੜਾ ਜਨਕ ਦੀ ਗੱਲ ਕਰਦੇ ਨੇ ਉਹ ਵੀ ਇਹੀ ਭਗਤੀ ਕੀਤੀ ਹੈ ਕਹਿੰਦਾ ਮਤਲਬ ਆਹੀ ਗੁਰਮਤਾ ਲਈ ਭਗਤੀ ਪ੍ਰਲਾਦ ਨੇ ਕੀਤੀ ਹੈ ਇਹੀ ਜਨਕ ਦੀ ਕੀਤੀ ਹੈ ਬਾਕੀ ਗੱਲਾਂ ਸਭ ਝੂਠੀਆਂ ਨੇ ਇਹਨਾਂ ਨੇ ਬਣਾਈ ਹੋਈਆਂ ਹੈ ਜੀ ਗੁਰਮੁਖ ਇਹ ਦੋਹੇ ਮਨ ਵਾਸਤੇ ਤਾਂ ਨਹੀਂ ਆਏ ਜੀ ਕਿ ਮਨ ਇਹਨਾਂ ਦਾ ਗੁਰਮੁਖ ਹੋ ਗਿਆ ਚਾਹੇ ਪ੍ਰਿਲਾਦ ਸੀ ਚਾਹੇ ਜਨਕ ਸੀ ਇਹੀ ਗੱਲ ਹੋਈ ਹੈ ਮਤਲਬ ਕਹਿਣ ਦਾ ਇਹ ਜਨਕ ਦੀ ਜਿਹੜੀ ਸੱਚੀ ਚ ਆਈ ਹੋਈ ਹੈ ਪ੍ਰਿਲਾਦ ਦੀ ਵੀ ਉਹਨੇ ਨੇ ਭਗਤੀ ਕੀਤੀ ਹੈ ਕੀਤਾ ਉਹ ਸਭ ਝੂਠ ਅੱਛਾ ਹਾਂ ਇਹਨਾਂ ਨੇ ਸਾਖੀਆਂ ਜਿਹੜੀਆਂ ਬਣਾ ਕੇ ਸਾਨੂੰ ਦਿੱਤੀਆਂ ਨੇ ਨਾ ਚਪਲ ਤੇ ਬੇਦਪੁਰਾਣ ਪੁਕਾਰਣ ਪੋਤੀਆਂ ਹਾਂ ਬਿਨਾਂ ਸਭ ਕੋਈ ਗੱਲ ਹੀ ਹੋਸੀਆ ਆਤਮ ਜੀ ਕੀਤਾ ਆਪਣਾ ਆਪ ਹੀ ਖੋਜਿਆ ਹੈ ਹਾਂਜੀ ਗੁਰਮੁਖ ਵਿਸ਼ਿਸ਼ਟ ਉਪਦੇਸ਼ ਸੁਣਾਈ ਬਿਨ ਗੁਰ ਹਰਨਾਮ ਨ ਕਿਨੇ ਪਾਇਆ ਮੇਰੇ ਭਾਈ ਦੇਖ ਲੋ ਉਕਰਾ ਗਿਆ ਵਿਸ਼ੇਸ਼ਪਤੀ ਉਹ ਗੁਰਮੁਖ ਖ ਹਰ ਉਪਦੇਸ਼ ਸੁਣਾਈ ਉਹਨੇ ਵੀ ਹਰ ਉਪਦੇਸ਼ ਸੁਣਿਆ ਔਰ ਸੁਣਾਇਆ ਠੀਕ ਹੈ ਜੀ ਜਿਵੇਂ ਆਪਣੇ ਭਗਤਾਂ ਦੇ ਗੁਰੂ ਸਾਹਿਬ ਬੋਲਣ ਚਲੇ ਆ ਉਪਦੇਸ਼ ਸੁਣਿਆ ਗੁਰਬਾਣੀ ਲਿਖੀ ਹੈ ਪਰ ਉਹਨੇ ਆਪ ਕੀ ਤੋਂ ਸੁਣਿਆ ਇਹ ਨਹੀਂ ਹੈਗਾ ਕਿਤੇ ਸਾਡੇ ਕੋਲ ਜ਼ਿਕਰ ਠੀਕ ਹੈ ਜੀ ਗੁਰਨਾਣਕ ਨੇ ਨਹੀਂ ਤੋਂ ਸੁਣਿਆ ਕੋਈ ਜ਼ਿਕਰ ਨਹੀਂ ਸਾਡੇ ਕੋਲ ਹੈਗਾ ਸੁਣਾਇਆ ਦਾ ਜ਼ਿਕਰ ਹੈ ਜੋ ਉਹਨੇ ਸੁਣਾਇਆ ਉਹ ਉਹਨੇ ਸੁਣਿਆ ਹੋਊ ਉਹੀ ਹੋਊ ਉਹੀ ਸਮਝਿਆ ਹੋਊਗਾ ਵਿਸ਼ੇਸ਼ ਨੇ ਵੀ ਇਹੀ ਭਗਤੀ ਕੀਤੀ ਹੈ ਕੋਈ ਭਗਤੀ ਹੈ ਇੱਕੋ ਹੀ ਤਰੀਕਾ ਹੈ ਪਾਰ ਪਾਇਆ ਜਾ ਸਕਦਾ ਹੋਰ ਕੋਈ ਦੂਸਰੀ ਭਗਤੀ ਨਹੀਂ ਦੀ ਠੀਕ ਹੈ ਜੀ ਵਿਸ਼ੇ ਨਾਮ ਸੁਣਾਈ ਉਨੇ ਵੀ ਇਹ ਉਪਦੇਸ਼ ਦਿੱਤਾ ਲੋਕ ਜਿਹਨੂੰ ਵੀ ਦਿੱਤਾ ਨਾ ਵੱਲਾ ਉਨੇ ਵੀ ਇਹ ਬਖਤੀ ਕੀਤੀਏ ਉਹਨਾਂ ਵੀ ਗ੍ਰੰਥ ਪੜ੍ਹੇ ਨੇ ਉਹ ਤੋਂ ਪਹਿਲਾਂ ਹੋਇਆ ਨਾ ਆਰਦ ਠੀਕ ਹੈ ਪਹਿਲਾਂ ਹੋਇਆ ਨੇ ਹਾਂ ਬੇਨਬੋਰਾ ਨਾ ਕਿਨੈ ਪਾਇਆ ਮੇਰੇ ਭਾਈ ਇਹ ਕਿਸੇ ਨੇ ਵੀ ਪ੍ਰਾਪਤੀ ਵੀ ਵਰਦਾ ਐ ਗਿਆਨ ਤੋਂ ਬਹਿਣਾ ਨਾਮ ਤੱਕ ਕੋਈ ਪਹੁੰਚਿਆ ਹੋਵੇ ਐਸੀ ਬਿਲਕੁਲ ਕੋਈ ਗੱਲ ਨਹੀਂ ਪਹਿਲਾ ਗੁਰ ਗਿਆਨ ਹੈ ਨਾ ਬੇਰ ਗੁਰ ਗਿਆਨ ਬਿਨਾਂ ਬਾਹਰੋਂ ਨਾ ਪਾਇਆ ਜਾਏ ਉਹ ਜਿਹੜਾ ਬਿਨਾਂ ਅੱਲਾਹ ਦੇ ਸੁਣਨ ਵਾਲਾ ਨਾਮ ਹੈ ਉਹ ਨਹੀਂ ਪਾਇਆ ਜਾ ਸਕਦਾ ਉੱਥੇ ਤੱਕ ਨਹੀਂ ਪਹੁੰਚਿਆ ਜਾ ਸਕਦਾ ਪਹਿਲਾਂ ਗਿਆਨ ਆਤਮ ਗਿਆਨ ਹੈ ਉਹਦੇ ਬਾਅਦ ਨਾਮ ਬਣਦਾ ਕਹਿਣ ਦਾ ਮਤਲਬ ਇਹ ਹੈ ਪਹਿਲਾਂ ਤਾਂ ਰਿਆ ਇਹਨਾਂ ਵਾਸਤੇ ਸਾਖੀਆਂ ਸਾਨੂੰ ਝੂਠੀਆਂ ਸੁਣਾਈ ਹੋਈਆਂ ਨੇ ਲੋਕਾਂ ਦੇ ਢੜਕੇ ਹੇ ਵੀ ਲੋਕ ਕਹਿੰਦੇ ਨੇ ਭਗਤੀ ਕਈ ਪ੍ਰਕਾਰ ਦੀ ਹੈ ਸਾਡੇ ਯੂਨੀਵਰਸਿਟੀ ਵਾਲੇ ਵੀ ਕਹਿੰਦੇ ਨੇ ਗੁਰਬਾਣੀ ਦਾ ਮਤਲਬ 9 ਪ੍ਰਕਾਰ ਨੇ 9000 ਦਾ ਨੋ ਵਾਲਾ ਵੀ ਇਹੀ ਅਰਥ ਕਰਦਾ ਉਹਨਾਂ ਨੇ 9 ਵੀ ਰੱਖ ਲਏ ਫੇਰ ਹਾਂਜੀ ਬਿਨ ਗੁਰ ਹਰ ਨਾਮ ਨਾ ਕਿੰਨੇ ਪਾਇਆ ਮੇਰੇ ਭਾਈ ਤੇ ਇਹ ਗੁਰ ਦੀ ਗੱਲ ਹੈ ਨਾ ਜੀ ਫਿਰ ਇਹ ਗੁਰੂ ਦਾ ਤਾਂ ਜੇ ਇੱਥੇ ਜ਼ਿਕਰ ਨਹੀਂ ਹੈ ਪਹਿਲਾਂ ਤਾਂ ਗੁਰ ਤੋਂ ਉਪਦੇਸ਼ ਲੈਣਾ ਹੈ ਜੀ ਨਾ ਨਾ ਗਿਆਨ ਪਾਇਆ ਬਸ ਪਹਿਲਾਂ ਚਾਹੇ ਪੜ੍ਹ ਕੇ ਪਾ ਲਿਆ ਠੀਕ ਹੈ ਜੀ ਗੁਰਬਾਣੀ ਵਿੱਚ ਇਹੀ ਗਿਆਨ ਗੁਰਬਾਣੀ ਤੋਂ ਗਿਆਨ ਲੈਦੇ ਹਾਂ ਜੇ ਗੁਰਬਾਣੀ ਦੀ ਸਮਝ ਆ ਗਈ ਤਾਂ ਨਾਮ ਤੱਕ ਪਹੁੰਚ ਜਾਗੇ ਜੇ ਸਮਝੇ ਨਹੀਂ ਆਈ ਤਾਂ ਮੈਂ ਗੁਰਮੁਖੀ ਹਰ ਭਗਤੀ ਹਰ ਆਪ ਲਹਾਈ ਗੁਰਮੁਖੀ ਇਹ ਗੁਰਮੁਖੀ ਭਗਤੀ ਹੈ ਗੁਰਮੁਖ ਖਾਨੇ ਹੀ ਭਗਤੀ ਕੀਤੀ ਹੈ ਸਾਰਿਆਂ ਨੇ ਹਰ ਆਪ ਲਹਾਈ ਇਹ ਆਤਮਿਕ ਭਗਤੀ ਹੈ ਭਗਤੀ ਦੇ ਵਿੱਚ ਆਤਮਾ ਖੋਜਣਾ ਆਤਮਾ ਨੂੰ ਲਹਾ ਹੈ ਵਿਚ ਭਗਤੀ ਤੁਸੀਂ ਪੜ ਕੇ ਤਾ ਗਿਓਂ ਸੀਲ ਵਰਤੀ ਨਾਲ ਹਾਂਜੀ ਅਬੇ ਸੇਲਪੰਤੀ ਆ ਆ ਆਪਣੇ ਨਾਲ ਪਰ ਸ਼ਾਂਤੀ ਹੋਣੀ ਉਹਦੀ ਲੋੜੀ ਸ਼ਾਂਤੀ ਜਿਹੜੀ ਹਰ ਕਰਨੀ ਹੈ ਹਰ ਦੀ ਭਗਤੀ ਦਾ ਭਾਵ ਦੀ ਅਖੋਜ ਕਰਨੀ ਹੈ ਗੁਰਬਾਰੇ ਹਾਂਜੀ ਹਰ ਜੀਓ ਗੁਫਾਰ ਦਾ ਰੱਖ ਕੇ ਬਾਜਾ ਪਵਣ ਮਜਾਇਆ ਜਿਹੜਾ ਚੇਤਾ ਹਰ ਹੈ ਉਹਨੂੰ ਲਾਹਾ ਮਿਲਣਾ ਹੈਗਾ ਬੰਨੇ ਦਾ ਮਰਜ਼ਾ ਨਹੀਂ ਬੰਨਾ ਇਹਦੇ ਨਾਲ ਦੇਖੋ ਇਸ ਭਗਤੀ ਨਾਲ ਗੁਰਬਾਣੀ ਸਮਝਣਾ ਮਨ ਜਾਣਾ ਹਰ ਦੇਬ ਸਬਦ ਹੋ ਜਾਣਾ ਅਰੇ ਉਹਦੇ ਉਹਦੀ ਕਵੀ ਕਲਣੀਆਂ ਮਨ ਮਰ ਜਾਂਦੇ ਠੀਕ ਹੈ ਜੀ ਸਾਨੂੰ ਰਹਾ ਇਹ ਹਰਾ ਇੱਥੇ 13ਵੀਂ ਪੌੜੀ ਦੀ ਸਮਾਪਤੀ ਹੈ ਜੀ ਜੀ